शिवलोक महला तीज़ा गुरका कहया जे करे सुखी हु सुखसार गुरकी करनी भो कटी है नानक पावेह पार गुरका कहया जे करे जो गुरबानी कहंदी है समझे जे सब ठीकै ओ गुरका कह जे जदे करू जे समझ के करू वे तो गोड़ना कुछ झोर के करूंगा कुछ और ਤੁੱਕੀ ਹੋਂ ਸੁਖਸਾਰ ਸੁਖੀ ਹੋ ਜੂਗਾ ਤਾਂ ਅਰ ਸੁਖ ਨਾਲ ਸੁਖੀ ਹੋਊਗਾ ਅਸਲੀ ਸੁਖ ਨਾਲ ਸਦਾ ਸੁਖ ਹੋ ਜੂ ਉਹ ਨੂੰ ਸੁਖਸਾਰ ਸਾਰ ਗਿਆਨ ਜਿਹੜਾ ਗੁਰਬਾਨੀ ਦਾ ਸਾਰ ਗਿਆਨ ਇਹਦੇ ਨਾਲ ਸੁਖ ਮਿਲਦਾ ਗੁਰ ਕੀ ਭੋ ਕਰ ਕੱਟ ਗਿਆ ਵੇੜੀ ਗੁਰ ਕੀ ਹੈ ਗੁਰਬਾਨੀ ਅਨੁਸਾਰ ਜੇ ਚੱਲੀਏ ਤਾਂ ਕੋਈ ਕਿਸਬਦੀ ਕਿਸੇ ਗੱਲ ਦੀ ਭੈ ਜੀ ਰਹਿੰਦੀ ਸਾਰੇ ਕਿਸਬਦੀ ਪੈਰ ਡਰ ਕੱਟੇ ਜਾਂਦੇ ਨੇ ਪਾਣੀ ਚ ਰਹਿਣਾ ਜਦ ਜਿਹੜਾ ਪਾਣੀ ਚ ਜਾਂਦਾ ਉਹ ਡਰ ਰਹਿੰਦਾ ਹੀ ਨਹੀਂ ਨਾਣਕ ਉਹ ਸਮਝਣ ਦੀ ਗੱਲ ਇਸ ਤਰ੍ਹਾਂ ਕਿਲੇ ਕਿਸੇ ਹਕੀਮ ਨੇ ਨੁਕਸਾ ਦਿੱਤਾ ਸੀ ਕਿ ਆਹ ਦਵਾਈ ਹਲਾ ਕੇ ਨਾ ਮਾਈ ਨੂੰ ਦੇ ਦਿਓ ਇਹ ਸਮਝ ਆਈ ਵੀ ਸ਼ਾਇਦ ਮਾਈ ਹਲਾਉਣੀ ਹੈ ਦਵਾਈ ਨਹੀਂ ਹਲਾਉਣੀ ਉਹਦਾ ਇੱਕ ਜੀ ਹਲਾਉਣੀ ਉਹਨਾਂ ਨੂੰ ਕਦ ਸਭ ਜਾ ਗਈ ਹਾਂ ਵੀ ਜੇ ਇਸ ਤਰ੍ਹਾਂ ਆਪਾਂ ਗੁਰ ਕੀ ਜਿਹੜੀ ਗੱਲ ਹੈ ਸੁਣ ਕੇ ਸਮਝ ਕੇ ਕਰਾਂਗੇ ਤਾਂ ਸੁਖ ਹੋਊਗਾ ਮਾਈ ਬਗੈਰ ਸਮਝੇ ਤਾਂ ਫਿਰ ਉਹ ਗੁਰ ਕੀ ਨਿਰਕਾਰ ਰਹੇ ਫਿਰ ਦਵਾਈ ਹਲਾ ਕੇ ਦੀ ਦਿੱਤੀ ਦਵਾਈ ਹਲਾ ਹੀ ਮਾਈ ਨੂੰ ਹਲਾਇਆ ਮਾਈ ਆਪਣੀ ਪਾਰ ਹੋ ਤੇ ਦਵਾਈ ਦਾ ਅਸਰ ਵੀ ਕੀ ਹੋਣਾ ਸੀ ਫਿਰ ਇਸ ਤਰ੍ਹਾਂ ਦੀ ਹਰਕਤ ਤੋਂ ਬਚਣਾ ਹੈ ਜੀ ਜੀ ਮਹੱਲਾ ਤੀਜਾ ਸਚ ਪੁਰਾਣਾ ਨਾਥੀਐ ਨਾਮ ਨਾ ਮੈਲਾ ਹੋਏ ਗੁਰ ਕੈ ਭਾਣੇ ਜੇ ਚੱਲੈ ਬੋਹੜ ਨ ਆਵਣ ਹੋਈ ਤੇ ਕੋਈ ਜਿਹੜਾ ਸੱਚ ਹੁੰਦਾ ਪੁਰਾਣਾ ਨਹੀਂ ਹੁੰਦਾ ਪੁਰਾਣੇ ਦਾ ਮਤਲਬ ਹੈ ਸੱਚ ਸੱਚੇ ਰਹਿਦਾ ਹਜ਼ਾਰ ਸਾਲ ਨੂੰ ਵੀ ਸੱਚੇ ਹੈ ਉਹ ਜੋ ਕੋਈ ਕਮੀ ਨਹੀਂ ਕਰ ਸਕਦਾ ਕਬੀ ਜੇ ਕੜਵੀ ਪੁਰਾਣਾ ਹੋ ਜਾਣਾ ਹੁੰਦਾ ਨਾਮ ਨਾ ਮੈਲਾ ਹੋਏ ਨਾਮ ਉਹਨੂੰ ਕਹਿਣਾ ਨਹੀਂ ਜਿਹੜਾ ਮੈਲਾ ਨਹੀਂ ਹੁੰਦਾ ਪਰਮਲੀ ਜਿਹਦੇ ਅਸਰ ਕਰ ਸਕਦਾ ਗਿਆਨੀ ਇਹਨੂੰ ਭੁਲਾ ਨਹੀਂ ਸਕਦਾ ਇੰਦਰਾ ਵਾਲੇ ਨੂੰ ਪਰਮਲੀ ਭੁਲਾ ਸਕਦਾ ਪਰਮ ਨੂੰ ਤਾਂ ਨਾਮ ਕੱਢਦਾ ਸਾਬਣ ਨਹੀਂ ਮੈਲਾ ਹੁੰਦਾ ਸਾਬਣ ਸਮਾ ਉਹ ਕੱਪੜੇ ਦੀ ਮੈਲ ਕੱਢਦਾ ਕੁਰਕੇ ਪਾਣੇ ਜੇ ਚੱਲਣ ਕੋੜ ਨਾ ਆਵਣ ਸੋਏ ਦੇਖੋ ਉਹੀ ਗੱਲ ਆ ਗੁਰਕੇ ਪਾਣੇ ਜੇ ਚੱਲੇ ਜੋ ਗੁਰਕੇ ਪਾਣੀ ਚੱਲਦਾ ਹੈ ਗੁਰਬਾਨੀ ਤੇ ਗੱਲ ਚੱਲਦਾ ਹੈ ਬੋਲਣਾ ਬਲੋ ਜਨਮ ਦੀ ਦੁਆ ਹੋ ਸਕਦਾ ਉਹਦੀ ਇੱਕ ਜਨਮਾ ਚਾਹੇ ਉਹ ਕਰਾ ਲਵੇ ਚਾਹੇ ਨਾ ਕਰਾਵੇ ਰਹਿੰਦਾ ਸੱਚ ਕੱਢਿਆ ਉਹ ਵੀ ਉੱਥੇ ਹੀ ਆ ਦੁਆ ਵੀ ਹੋਤੀ ਰਹੇ ਦੁਆਾਂ ਦੀ ਕੁਛ ਸੰਸਾਰ ਦੇ ਉੱਤੇ ਮਤਲਬ ਹੈ ਹਕੂਮਤ ਚੱਲਦੀ ਆ ਬੋਲਦੇ ਨੇ ਉਹਨਾਂ ਦੀ ਇੱਛਾ ਅਨੁਸਾਰ ਸੰਸਾਰ ਚੱਲਦਾ ਉਹ ਨਾਲ ਸਰਦਾਰ ਨੂੰ ਆਪਣੀ ਇੱਛਾ ਚਲਾਉਣ ਦੀ ਧੋੜ ਹੈ ਉਹ ਆਪਣੇ ਅਰੰਧੇ ਚ ਮਾਸਟਰ ਹੈ ਦਾ ਤੇ ਕੋਈ ਤਾਂ ਰਹਿੰਦਾ ਪਰ ਦਖਲ ਨਹੀਂ ਦਿੰਦਾ ਸਰਦਾਰ ਜੋ ਕੋਈ ਦੇਖਦਾ ਹੀ ਰਹਿੰਦਾ ਆਵਣ ਕਿੰਨ ਦਾ ਦੁਬਾਰਾ ਸਰੀਰ ਨੀ ਲਏਗਾ ਹਾਂਜੀ ਜਨਮ ਜੀ ਦੁਬਾਰਾ ਹੋ ਸਕਦਾ ਹੁੰਦਾ ਉਹਦੀ ਇੱਛਾ ਤੇ ਜਦੋਂ ਆਪਾਂ ਪੜਦੇ ਨਾਮ ਨਾ ਮੈਲਾ ਹੋਏ ਇਸ ਤੋਂ ਬਦਲ ਲੱਗਦਾ ਸਰੂਪੀ ਹੈ ਹਾਂਜੀ ਗਿਆਨੀ ਹੈ ਨਾ ਪਰਮਾ ਕੌਣ ਦਊ ਗਿਆਨ ਵਾਂਗੂ ਅਰਮ ਗਿਆਨੀ ਦਾਨੀਆ ਦਾ ਅਸਰ ਹੋ ਸਕਦਾ ਜਿਹੜਾ ਨਾਮ ਜਪਦੇ ਨੇ ਵਾਹਿਗੁਰੂ ਉਹ ਉਹ ਪਰਪਤਿਕ ਉਹਦੇ ਉਹਨਾਂ ਦਾ ਮਨ ਮਿਹੜਾ ਕਿਉਂ ਹੈ ਬੋਝ ਮਿਹੜਾ ਕਿਉਂ ਹੈ ਲੋਕ ਤਾਂ ਵੀ ਹੈਗੀ ਆ ਉਹ ਗਿਆਨ ਸਰੂਪੀ ਨਾਮ ਨਹੀਂ ਸਮਝਦੇ ਉਹ ਸਿਰਫ ਇੱਕ ਜਿਹੜਾ ਪੁਰਾਤਨ ਚੱਲੇ ਆ ਰਿਹਾ ਵੀ ਕਿਸੇ ਅੱਖਰ ਨੂੰ ਆਪਾਂ ਨਾਮ ਸਮਝ ਕੇ ਜਪਣਾ ਉਹ ਨਾਮ ਹੈ ਹੀ ਨਹੀਂ ਜੇ ਨਾਮ ਹੁੰਦਾ ਫਿਰ ਅੰਦਰੋਂ ਭਰਮ ਦਾ ਵਿਨਾਸ਼ ਹੋ ਜਾਂਦਾ ਉਹ ਜਿਹੜੇ ਅੰਦਰ ਔਗਲ ਹੋ ਵੀ ਚਲੇ ਜਾਂਦੇ ਠੀਕ ਹੈ ਜੀ ਨਾਲ ਗੁਰਬਾਣੀ ਦੇ ਅਰਥ ਜਿਹੜੇ ਆ ਉਹ ਵੀ ਸਾਹਮਣੇ ਆ ਜਾਂਦੇ ਸਹੀ ਤੇ ਸਹੀ ਸਾਹਮਣੇ ਆਏ ਤਾਂ ਆਈ ਦੀ ਤਾਲੀ ਦਾ ਹੈ ਨਾਨਕ ਨਾਮ ਕਹਿੰਦੇ ਪਰ ਇਹ ਵੀ ਗੱਲ ਹੈ ਇਸ ਹਾਲਤ ਵਿੱਚ ਖਤਰਾ ਵੀ ਹੈ ਜੇ ਨਾਮ ਬਿਸਰਜਵੇ ਨਾ ਛੱਡ ਦੇ ਗੁਰਦੇ ਪੰਡ ਚੱਲਣ ਆਪੜ ਜਾਣਾ ਫਿਰ ਵੀ ਉਹ ਹੋ ਜਾਂਦਾ ਇੱਥੇ ਕਹਿ ਰਿਹਾ ਕਬੀਰ ਅਭਿਦੰ ਰੋ ਸਮੁੰਦਰ ਮੇਂ ਕਿਆ ਜਾਣਾ ਕਿਆ ਹੋਏ ਕੋਈ ਅਜ ਜਮਲਗ ਤਾਗਾ ਬਾਹੂ ਗਈ ਅਭਲਗ ਰਾਮ ਸੰਦੇਹੀ ਸਦੀਰਾਮ ਵੀ ਬਿਸਣ ਦਾ ਖਤਰਾ ਜਾ ਤੱਕੇ ਠੀਕ ਹੈ ਜੀ ਵੀ ਜੀ ਭੰਗ ਹੋ ਜਾਣਾ ਜੀ ਭੰਗ ਹੋਈ ਨਹੀਂ ਭੁੱਲਣਾ ਭਾਦੇ ਆਪਣਾ ਹੋਰ ਪਾਸੇ ਭਾਇ ਚਲੇ ਜਾਣ ਇਹ ਤੇ ਪਰਪਲਚਾ ਚ ਨੇ ਜੇ ਤਕਤੀ ਨੂੰ ਛੱਡ ਕੇ ਭਾਏ ਭਗਤ ਭਗਵਾਨ ਹਿਤ ਮਾਇਆ ਲਿਪਤਨਾ ਰੰਚ ਰੰਚ ਪਰ ਵੀ ਮਾਇਆ ਨਾਲ ਲਿਪਤਨਾ ਹੋਵੇ ਭਗਵਾਨ ਦੀ ਭਗਤੀ ਵਿੱਚ ਹੀ ਜਿਤ ਹੋਵੇ ਨਾ ਗੁਰਦੀ ਭਗਤੀ ਨਾਲ ਜੁੜਿਆ ਹੋਵੇ ਪਰ ਇੱਥੇ ਅਗੇ ਵਿਰਲੇ ਕਈਆਂ ਨਾਨਕਾਂ ਜਿਹਨਾਂ ਦਾ ਚੇਹਰ ਪਰਪੰਚ ਵਿਰਲੇ ਹੀ ਰਹ ਜਾਂਦੇ ਨੇ ਪਰਪੰਚ ਤੋਂ ਬਾਅਦ ਜੇ ਪਰਪੰਚ ਲੋਕਾਂ ਦੀ ਗੱਲ ਸੁਣ ਕੇ ਹੋਣਾ ਪਾਇਏ ਗੱਲ ਲਈਏ ਦੋਹਾਂ ਦੀ ਸੁਣਨ ਲੱਗ ਜਾਏ ਜਿਹੜੇ ਕੋਲ ਬੈਠੇ ਪਰਪੰਚ ਰਾਚਲਵੇ ਸਭ ਜੋ ਫਿਰ ਗਿਆ ਡੁੱਬ ਗਿਆ ਠੀਕ ਹੈ ਜੀ पौड़ी मंगत जन जाचे दान हर देहे सुभाए हर दर्शन की प्यास है दर्शनी तृपताई आ मंगत जन जाचे दान जेला है जे ओ कुछ कदे बुद्धदा भी है ताव नावे बुददा है और नहीं कुछ बुददा दान बुददा है ओ नावदा जन जाचे दान हर देहे सुभाए ਇਹ ਹਰ ਸੁਭਾਅ ਬਦਲ ਕੇ ਆਪਣੀ ਬਰਗਾ ਸੁਭਾਅ ਕਰਦਾ ਹੈ ਜੈ ਤੇਰਾ ਸੁਭਾਅ ਹੈ ਉਹ ਮੇਰਾ ਸੁਭਾਅ ਕਰਦੇ ਬਦਲਦੇ ਹਰ ਦਰਸ਼ਨ ਕੀ ਪਿਆਸ ਮੈਨੂੰ ਦਰਸ਼ਨ ਦੀ ਪਿਆਸ ਹੈ ਹੋਰ ਨਹੀਂ ਕੁਛ ਹੈਗਾ ਤੂੰ ਵੀ ਦਰਸ਼ਨ ਦੀ ਪਿਆਸ ਹੈ ਤੈਨੂੰ ਵੀ ਮੈਨੂੰ ਵੀ ਦਰਸ਼ਨ ਦੀ ਪਿਆਸ ਹੈ ਤੈਨੂੰ ਦਰਸ਼ਨ ਦੀ ਪਿਆਸ ਹੈ ਅੱਜ ਮੈਨੂੰ ਦਰਸ਼ਨ ਦੀ ਪਿਆਸ ਵੀ ਅਗਲੀ ਤੇਰੇ ਵਾਲੀ ਹੋਈ ਹੈ ਤੇ ਜਿਹੜੀ ਤੇਰੀ ਇੱਛਾ ਸੀ ਉਹੀ ਮੇਰੀ ਇੱਛਾ ਹੈ ਹੁਣ ਹਰ ਦਰਸ਼ਨ ਦੀ ਪਿਆਸ ਹੈ ਦਰਸ਼ਨ ਕਰਤਾ ਹੈ ਉਹ ਦਰਸ਼ਨ ਵਾਲੇ ਤ੍ਰਿਪੀ ਹੋਣੀ ਐ ਅਸਰ ਦੇ ਵਿੱਚ ਆਇਆ ਦਾਦਾ ਛੜ ਦਿੱਤੀ ਇੱਛਾ ਉਹ ਦਰਸ਼ਨ ਦੀ ਇੱਛਾ ਹੈਗੀ ਹੈ ਜੇ ਤੇਰੀ ਜਿਹੜੀ ਇੱਛਾ ਉਹੀ ਮੇਰੀ ਚ ਛਿੰਨ ਪਲ ਘੜੀ ਨਾ ਜੀਵੋਂ ਬਿਨ ਦੇਖੇ ਮਰਾਂ ਮਾਏ ਸਤਿਗੁਰੂ ਨਾਲ ਵੇ ਨਦਾਰਸ਼ਨ ਦੇਖੇ تھے ਪਰ ਜਿੰਨੇ ਜਲਦੀ ਦੇਖ ਲਵੋ ਉਹਨਾਂ ਹੀ ਚੰਗਾ ਆ ਜਿਹੜਾ ਜੀਵਨ ਬਿਨਾ ਦੇਖੇ ਦਾ ਇਹ ਨਹੀਂ ਜਿੰਨਾ ਲੱਗਦਾ ਮੈਨੂੰ ਤੇ ਸਭ ਨੇ ਉਪ ਗਿਆ ਕਿਉਂਕਿ ਬਿਨਾ ਦੇਖੇ ਤੇ ਜੇ ਦਰਸ਼ਨ ਹੋਇਆ ਤਾਂ ਮੋਤ ਵਿੱਚ ਤੇ ਸਤਗੁਰ ਨਾਲ ਦਿਖਾਲਿਆ ਸਤਗੁਰ ਨਾਲ ਹੀ ਦਿਖਾਲਿਆ ਜਿਹਨੂੰ ਵੀ ਦਿਖਾਲਿਆ ਸਤਗੁਰ ਨਾਲ ਦਿਖਾਲਿਆ ਰੱਬ ਰਿਹਾ ਸਭ ਚੱਲ ਉਹ ਕਹਿੰਦੇ ਸਾਰੇ ਥਾਣੇ ਰੱਬ ਰਿਹਾ ਹੁਕਮ ਤਾਂ ਥਾਣਿਆਂ ਚ ਹੈ ਸੁੱਤਿਆਂ ਆਪ ਉਠਾਲ ਦੇ ਨਾਨਕ ਲਿਵ ਲਾਏ ਸੁੱਤਿਆਂ ਆਪ ਉਠਾਲ ਦੇ ਸੁੱਤਿਆਂ ਆਪ ਉਠਾਲ ਦੇ ਉਲਕਾਉਂ ਨਾ ਢੜ ਦੇ ਸੁੱਤਿਆਂ ਮਹਾਕਮਾਲੀ ਉੱਠੜਦਾ ਸੁੱਤਿਆਂ ਆਪ ਉਠਾਲ ਦੇ ਨਾਨਕ ਲਿਵ ਲਾਏ ਨਾਨਕ ਇਹਨਾਂ ਨੂੰ ਜਾਗਦਾ ਲੱਗਦਾ ਹੈ ਜਾਂ ਸੁੱਤਾ ਉੱਠ ਜਾਗ ਪੈਂਦਾ ਜਿੰਨਾ ਚਿਰ ਜਾਗਦਾ ਨਹੀਂ ਲਿਵ ਲੱਗਦੀ ਉਹਦੀ ਜੋਗੀਆਂ ਨੇ ਲਿਵ ਕਿਉਂ ਨਹੀਂ ਲੱਗੀ ਜਾਗ ਰਹੀ ਜਾਗੇ ਹੀ ਜਾਂਦਣ ਵਾਲੇ ਰਾਹੇ ਨਹੀਂ ਪਏ ਜਾਗਰਾਂ ਨੇ ਤਾਂ ੱੱਲੇ ਦੀ ਕੀਤੀ ਲਿਵ ਲੰਬੀ ਲਾਉਣ ਦੀ ਪ੍ਰੈਕਟਿਸ ਕਰਦੇ ਲਾ ਲਓ ਦੀ ਚੇਤਨਾ ਲੱਗਣੀ ਸੀ ਜੀ ਲੱਗੜੀ ਤਾਂ ਸੀ ਪਰ ਗਿਆਨ ਤੇ ਬਿਨਾਂ ਕਦੇ ਲੱਗਦੀ ਗਿਆਨ ਦੀ ਨਾ ਲੈ ਰਹੇ ਉੱਥੇ ਇੱਥੇ 29ਵੀਂ ਪੌੜੀ ਦੀ ਸਮਾਪਤੀ ਹੈ ਜੀ